ਬੈਸਰੂ ਸੋ ਜਿਸ ਉੱਪਰ ਸੁਪਰ ਸਾਮ ਹੁਣ ਇੱਕ ਬੈਸਰੂ ਲਾਫਟ ਚਲਿਆ ਸੀ ਪਿੱਛੇ ਬੈਸਰੂ 23 ਹੀ ਬੈਸਰੂ ਬੈਸਰੂ ਤਾਂ ਉਹ ਕਹਿਣਾ ਜਿਹੜਾ ਮਾਸਾ ਖਾਓ ਮਾਸਾ ਤੋਂ ਮਣੇ ਤੋਂ ਉਹ ਆਹ ਉੱਥੇ ਲੱਗੇ ਉਹ ਵਾਕ ਨੇ ਉੱਥੇ ਆਈ ਹੁਣੇ ਉੱਥੇ ਗਾ ਵੋੜ ਆਮ ਆਸਵੰਸਰ ਮੂਰਤੀ ਅਗੜੇ ਉਹ ਜ ਵਿਆਖਿਆ ਉਹ ਉਹਦਾ ਸਮਾਪਤੀ ਹੀ ਆਤਮਾ ਹੈ ਆਤਮਾ ਹੈ ਜੋ ਜਿਉਂਦੀ ਚੇਤਨਾ ਜੋ ਜਿਉਂਦੀ ਖਰਾਬ ਜੜ ਹੋ ਗਈ ਉਹ ਬੇਸ਼ੂਰ ਜੀ ਰਹੀ ਬੇਦਿਗ ਮਾਇਆ ਥਾਰਿਓ ਜਿੱਤ ਮਾਇਆ ਸਾਰੀਓ ਮਾਇਆ ਦਾ ਤਾਹੇ ਕਹੇ ਤੋਇਓ ਹਾਨ ਕਮਾਦ ਕਪਾਹਾ ਤੋਇਓ ਸਿਰਪ ਬਹੰਗਨੋ ਪਾਣੀ ਤੋਂ ਪਾਣੀ ਤੋਂ ਉਹ ਕਹਾਂਗਾ ਜੇ ਤੂੰ ਪਾਣੀ ਪੀਛੜ ਤਬਈ ਬੈਠੂਸ ਨੇ ਅਸੀਂ ਬੁੱਧੂ ਫਿਰ ਤੂੰ ਬੈਠੂ ਕੋਈ ਗੱਲ ਐ ਤੈਨੂੰ ਸੁਣੋ ਜਿਸ ਉੱਪਰ ਸੁਪਰ ਸੌ ਪਿੱਛੇ ਜੋ ਗੱਲ ਕਹੀ ਜੁਈ ਹੈ ਉਹ ਗੱਲ ਦੇ ਤੇ ਕਹੀ ਹੈ ਜਿਸ ਉੱਪਰ ਸੁਪਰ ਸੌ ਪਹਿਲਾਂ ਤਾਂ ਪਰਮੇਸ਼ਰ ਪ੍ਰਸੰਨ ਹੋਏ ਵਾਕੇ ਬੈਜੂ ਰੂ ਹੈ ਇਹ ਬੈਜੂ ਤੇ ਪ੍ਰਸੰਨ ਹੁੰਦਾ ਜੇ ਕੋ ਬੈਸ ਨੂੰ ਹੋਜੂਗਾ ਪਾਸ ਕਰ ਦੂਗਾ ਉਹ ਤਾਂ ਪਰਮਾ ਪਰਮੇਸ਼ਰ ਪ੍ਰਸੰਨ ਹੋ ਜਾਂਦਾ ਮ ਖੁਜੋ ਜਾਂਦਾ ਕਿਉਂ ਖੁਜੋ ਜਾਂਦਾ ਬੇਜਨ ਕੀ ਮਾਇਆ ਕੀ ਜਿਹੜੀ ਮਾਇਆ ਆ ਸਾਰੀ ਮਾਇਆ ਸਰੀਰ ਵੀ ਨੂੰ ਮਾਇਆ ਜਿੱਤੀ ਹੈ ਇਹਦੇ ਅਲੱਗ ਹੋ ਜਾਂਦਾ ਜੀਵਨ ਮੁਕਤ ਹੋ ਜਾਂਦਾ ਉਹ ਬੇਜਨ ਉਹ ਬੇਜਨ ਉਹ ਸਰੀਰ ਨਹੀਂ ਖਾਣਾ ਮੌਦ ਉਹ ਤਾਂ ਖਾਂਦਾ ਨਹੀਂ ਫਿਰ ਸਰੀਰ ਨਾਲ ਸਰੀਰ ਦੀ ਬਾਤ ਖਾਂਦਾ ਹੀ ਮਾਸ ਹੈ ਮਾਸ ਵੱਧ ਹੀ ਮਾਸ ਖਾ ਕੇ ਬੱਚੇ ਦਾ ਕਿੰਨਾ ਸਰੀਰ ਹੁੰਦਾ ਜੇ ਉਹ ਜੋ ਵੀ ਖਾਦਾ ਹੈ ਜੋ ਵੀ ਖਾ ਰਿਹਾ ਹੈ ਜੋ ਖਾਤਾ ਬਾਸ ਹੈ ਜੇ ਮਾਸ ਵਦੇ ਜੇ ਦੁੱਧ ਵੀ ਕਿਤੇ ਦੁਹਰੀ ਮਾਸ ਦਾ ਮਾਇਆ ਹੀ ਮਾਸ ਹੈ ਤਾਂ ਮਾਸ ਵਦੇ ਉਹਦੇ ਵਿੱਚ ਮਾਸ ਹੈ ਮਾਇਆ ਨੂੰ ਮਾਸ ਕਿਹਨ ਹੀ ਮਾਇਆ ਹੈ ਵਾਇਏ ਬਾਸ ਨੇ ਉਹ ਮਾਸ ਮਾਇਆ ਨੂੰ ਫਸੇ ਮਾਇਆ ਜਾਨੀ ਮਹਾਦੇਵ ਨਾਲ ਇਸ ਮਾਸ ਇੱਕ ਡਿਕਸ਼ਨਰੀ ਸਾਡੀ ਥੋੜੀ ਜਿਹੀ ਨਾ ਬੇਜ ਵਾਲੀ ਜਿਹੜਾ ਬੇਜ ਹੈ ਉਹ ਡਿਕਸ਼ਨਰੀ ਦੇ ਵਿੱਚ ਉਹ ਮਹਾਸ ਮਾਇਆ ਨੂੰ ਹੈ ਨਹੀਂ ਬਾਦਰੂ ਮੱਟੀ ਪਿਆ ਨਾ ਉਸ ਗੱਲ ਕਰੋ ਜਿਹੜੇ ਸਪਿਟੀ ਕਰਦੇ ਨੇ ਮਿੱਟੀ ਵੀ ਮਾਇਆ ਹੀ ਆ ਮਿੱਟੀ ਦੇ ਸਾਰੇ ਚੀਜ਼ ਪੈਦਾ ਹੁੰਦੀ ਹੈ ਮਿੱਟੀ ਦੇਲੇ ਇੰਦਰ ਹੈ ਮਿੱਟੀ ਦੇ ਚੀਜ਼ ਸਾਰੀ ਪੈਦਾ ਹੁੰਦੀ ਹੈ ਨਾ ਮਿੱਟੀ ਬਣ ਮਿੱਟੀ ਖਾਣ ਨਾਲ ਦਾ ਮਾਸ ਬਣਦਾ ਸੋ ਕਬੱਟੀ ਹੋਖ ਹੁੰਦੀ ਹੈ ਕਈ ਜੀਸਾਂ ਮਿੱਟੀ ਖਾਣਿਆ ਨਾ ਮਿੱਟੀ ਖਾਂਦਾ ਰਵਾ ਮਿੱਟੀ ਮਾਸ ਬਣਦਾ ਆ ਸਾਰੀ ਮਿੱਟੀ ਉਹ ਉਹ ਬਣਦੀ ਹੈ ਮਿੱਟੀ ਖਾਣ ਦੀ ਹੈ ਤਾਂ ਉਸ ਮਿੱਟੀ ਖਾ ਜਾਂਦਾ ਨੇ ਆਪਾਂ ਫਲ ਖਾਂਦੇ ਆ ਉਹ ਮਿੱਟੀ ਜਿਹੜੀ ਉਹ ਫਲ ਚਾਹੀ ਉਹ ਆਪਣੇ ਜਾ ਜਾਂਦੀ ਹੈ ਇਹ ਤਾਂ ਸਰਕਲ ਹੈ ਜੋ ਜਿਹਾ ਮਾਇਆ ਦੇ ਹੋਏ ਬੈਨੋ ਆਸ ਉਹਨੂੰ ਜੋ ਮਨ ਮੋੜਨਾ ਤੇ ਜੇ ਇਹ ਨਹੀਂ ਘੰਟਾ ਨਾ ਜੇ ਇਹ ਦਾ ਟੇਸੀ ਛੱਡ ਕਾਇ ਨੇ ਤਾਂ ਹੈ ਬੈਸ ਰੂ ਆਦਮਾ ਸਰੀਰ ਹੰਦਾ ਰਹੇ ਜੀਦਾ ਇਹ ਨਾਲ ਮਤਲਬ ਬੈਨ ਹੋ ਗਿਆ ਉਹਦਾ ਹੋ ਜੋ ਘਾਦਾ ਉਹ ਆਪਣਾ ਖਾਬੇ ਆਪਣਾ ਨਾ ਉਹਦਾ ਹੋ ਪਾਏ ਪਰ ਡੌਰ ਤੇ ਗੱਡੀ ਚ ਪਾਇਆ ਟੈਲ ਥੋੜੀ ਪੀਤਾ ਡਰਾਈਵਰ ਨੇ ਸਰਪੇ ਦੀ ਲੋਡ ਜੂ ਰਹਾ ਗੱਡੀ ਚਾਹੀਦੀ ਆ ਉਹ ਨੂੰ ਪਾ ਹੈ ਜੀ ਸਰੇਤ ਦੀ ਖਰਾਕ ਨੂੰ ਆਦਮੀ ਦੀ ਖਰਾਕ ਬੰਦ ਜਿਹੜੀ ਕਿ ਗਲਤ ਹੈ ਕਰਮ ਰੋਟੀ ਵੀ ਖਾਣਾ ਸਾਰੇ ਕਰਦਾ ਪਰ ਕਰਦਾ ਨਹੀਂ ਹੈ ਕਰਾਇਆ ਕਰਦਾ ਸਰੀਰ ਦੀ ਲੋੜ ਹੈ ਗੱਡੇ ਦੀ ਲੋੜ ਹੈ ਪਾਣੀ ਪਾਉਣ ਪਊਗਾ चीदी है, पानी बना ना चला नहीं मजबूरी है तू दर माचता डॉक्टर फर्के नहीं समझ गए पहला मम्मा वासा उप गया वो सारे मास ग्रास पहला दूध ही रह रहता वही मास है तू दर माचता डॉक्टर भी नहीं समझ जानवर भी दूध न ਕਿੰਨਾ ਪਹਿਲਾਂ ਉਹਦਾ ਮਾਸ ਹੁੰਦਾ ਸਾਰਾ ਸੱਜਣ ਕਿਸੇ ਚਲੇ ਜਾਂਦਾ ਸਾਰਾ ਮਾਜੂਦੀਪਾ ਦੇ ਬੱਚੇ ਪੀਜਾ ਤਾਂ ਆਈ ਮਾ ਕਿਸੇ ਨੂੰ ਪਤਾ ਨਹੀਂ ਉੱਟੀ ਕਿੰਨੀ ਜਿਆਦਾ ਦੱਨੇ ਬਸ ਉਹਨਾਂ ਤਾਂ ਵੀ ਮਾਸ ਹੁੰਦਾ ਫਰਦਾ ਰਹਿੰਦਾ ਦੁੱਧ ਜਾਂਦਾ ਤਾਂ ਪ੍ਰਵਕਤਾ ਨੇ ਮਾਧਵਨ ਗਿਆ ਦੁੱਧ ਬਣ ਗਿਆ ਦੁੱਧ ਬਣ ਗਿਆ ਤਾਂ ਮਾਧਵਨ ਗਿਆ ਇਹ ਤਾਂ ਚੱਲਦਾ ਚੇਂਜ ਆ ਸਟੇਟ ਹੁੰਦੀ ਰਹਿੰਦੀ ਹੈ अंतर गुछी लगी हुई आपने वो बजा दी रहे माने कर्म करत होवे ने कर्म किस फैसलो का निर्मल कर्म कर्म करत होवे ने कर्म वदी काम कर ज्या अपनी कोई इच्छा कोई नहीं है कर्म सारे अब सारे करता है। पर जेड़ा वो करना है वो ही करता ਓਹੋ ਹੱਥ ਪੈਰ ਕਰ ਕਰਦਾਂ ਚੀਤ ਨਾਲ ਨਹੀਂ ਕਰਦਾ ਹੱਥ ਪੈਰ ਕਰਕੇ ਕਰਦਾ ਸਰੀਰ ਦੀ ਸਰੀਰ ਦੇ ਕੁਝ ਮਾਇਆ ਦਾ ਕਰਦਾ ਤੇ ਸਰੀਰ ਦੀ ਲੋੜ ਵੀ ਹੈ ਮਾਇਆ ਦੀ ਸਰੀਰ ਆਪਣਾ ਕੰਮ ਕਰਦਾ ਆਪਣੀ ਲੋੜ ਪੂਰੀ ਕਰਦਾ ਉਹ ਆਪਣੀ ਲੋੜ ਸਰੀਰ ਦੀ ਭੁੱਖ ਸਰੀਰ ਦੇ ਕੰਮ ਚੋਂ ਹੋਣੀ ਹੈ ਪੂਰੀ ਉਹ ਭੁੱਖ ਆਪਣੇ ਕੰਮ ਚੋਂ ਪੂਰੀ ਹੋਣੀ ਹੈ ਦੋ ਅਲੱਗ ਅਲੱਗ ਸ਼ਬਦ ਵਿਚਾਰ ਚੋਂ ਜਦ ਸੋਚ ਜੋਂ ਉਡੀ ਆਤਮਾ ਦੀ ਕੋਰੀ ਹੋਂਦ ਜੰਗੀ ਹੋ ਜਾ ਜਿੰਕੀ ਬਚਾਰ ਹੈ ਉਹ ਜੋਤਾ ਆਤਮਾ ਦੀ ਫਰਾਗ ਹੈ ਆਈ ਜੁਨੇ ਆਪਣੇ ਕੰਮ ਇਹ ਜੀਵਰਾ ਉਸ ਜੀਵ ਕਰਨਾ ਕਰਮ ਕਰਤਰ ਹੋਵੇ ਕਰਮ ਯਾਨੀ ਉਹ ਵਿੱਚ ਉਹ ਆਪਣੇ ਇਸ ਹੀ ਦੇ ਵਿੱਚ ਕਿਹਾ ਕੋਈ ਕਰਮਤਾ ਕਰ ਕੋਈ ਫਲ ਦੀ ਇੱਛਾ ਨਾ ਰੱਖੋ ਆਹੀ ਗੱਲ ਹੈ નિਸ਼ਕਾਮ ਜਿਸ ਕਾਮ ਉਹ ਕਰ ਇਸ ਵੈਸ਼ਨੂ ਦਾ ਨਿਰਮਲ ਸਰ ਫਿਰ ਉਹ ਵੈਸ਼ਨੂ ਦਾ ਸਰ ਬੜਾ ਨਿਰਮਲ ਸਤਿਮੁਤਾ ਹੈ ਪਰ ਇਹ ਜੈ ਵੈਸ਼ਨੂ ਹੁੰਦਾ ਜਿਰਵੰਤਰ ਬੜਾ ਆ ਜਿਹੜੇ ਕਹਿੰਦਾ ਮਾਸ ਨਾ ਖਾਓ ਧਰਮ ਦੇ ਵਿੱਚ ਬੁਰੀ ਟਾਇਲ ਜਿਰਵੰਤਰ ਹੁੰਦੀ ਸਭੂ ਫਲ ਕੀ ਇੱਛਾ ਰਹੀ ਬਰਛੇ ਕਾਹੂ ਭਗਤੀ ਇਛਾ ਵਿੱਚ ਕਾਰਮੇ ਦੇ ਵਿੱਚੋਂ ਕਰਮ ਕਰਤਾ ਹੋਇਆ ਕਰਮ ਦੇ ਵਿੱਚੋਂ ਇੱਛਾ ਰੱਖ ਕੇ ਨਹੀਂ ਕਰਦਾ ਵੀ ਜਰੂਰ ਬਣੂਗਾ ਇਹ ਬਣਨਾ ਚਾਹੀਦਾ ਉਹਦਾ ਰੱਟ ਕੀ ਹੋਣਾ ਉਹ ਤਾਂ ਹੈ ਇਹ ਮਾਨੇ ਕੇ ਚੱਲੇ ਉਦੋਂ ਜਿਹੜਾ ਹੈਗਾ ਫਰਜ ਕਰਨਾ ਉਹ ਵੀ ਬਸਰਮਾਨੀ ਫਰਜ ਕਰਦਾ ਸਾਡਾ ਫਰਜ਼ ਹੈ ਦੇਣਾ ਤੇਰੀ ਮਰਜ਼ੀ ਹੈ ਤੇ ਆ ਤੇਰੀ ਰਜ਼ਾ ਹੈ ਕਰਨਾ ਸਾਡਾ ਫਰਜ਼ ਹੈ ਕਰਨਾ ਸਾਡਾ ਫਰਜ਼ ਹੈ ਜਿਨਾ ਤੇਰੀ ਇਛਾ ਰਜ਼ਾ ਫਰਜ਼ ਤੇ ਵੀ ਰਜਾਤਾ ਹੈ ਕਰਨਾ ਸਾਡਾ ਕਰਜ਼ਾ ਫਰਜ਼ ਹੈ ਤਾਂ ਫਰਜ਼ ਹੈ ਹਾਂਜੀ ਕੇਵਲ ਭਗਤੀ ਕੀਰਤਨ ਸੰਗ ਰਾਚੇ ਕੇਵਲ ਭਗਤੀ ਕੀਰਤਨ ਸੰਸਾਧਨ ਕਰਕੇ ਉੱਧ ਕਰਕੇ ਭਗਤੀ ਕੀਰਤਨ ਦੇ ਨਾਲ ਜਿਹੜਾ ਹੈ ਸਰੀਰ ਕਰਕੇ ਜਿਹੜਾ ਕਰਦਾ ਉਹਦੇ ਵਿੱਚ ਬਹੁਤ ਹੀ ਹੋਰ ਹੁੰਦਾ ਉਹਦੇ ਵਿੱਚ ਬਹੁਤ ਅਖਾਤ ਜਿਤਨਾ ਹੋਵੇ ਵੀ ਜੋ ਮਰਜੂ ਹੋ ਉਸੇ ਇਸ ਲਈ ਮੰਗੂ ਫਿਰ ਆਇਆ ਹੋ ਫਿਰ ਆਇਆ ਹੋ ਉਹ ਜਿਹੜਾ ਫਿਰ ਦੁਆ ਉਹਦੇ ਵਿੱਚ ਰਜਾ ਰਹੇ ਫਿਰ ਉਹਦੇ ਰਜਾ ਦੂ ਜੇ ਭਗਤੀ ਕੀਤੀ ਤਾਂ ਜਾਰੇ ਫਿਰ ਬਹੁਤਾ ਖਾਜੇ ਤਾਂ ਨਹੀਂ ਮਿਲਦਾ ਬਨੇ ਆਪੀ ਕਬੂਲ ਹਾਂ ਮਾਨਸਿਕ ਅੰਤਰ ਸ਼ਿਮਰਨ ਗੋਪਾਲ ਹਨ ਤਨ ਅੰਤਰ ਮਨਰ ਹਿਰਦੇ ਵਿੱਚ ਗੋਪਾਲ ਦਾ ਸਤੁੱਲੂ ਹੋਵੇ ਇਹ ਕੰਮ ਤਾਂ ਕਰਨਾ ਆ ਸਭ ਉੱਪਰ ਹੁਬਤ ਕਿਰਪਾਲ ਸਭ ਉੱਪਰ ਹੋ ਕਿਰਪਾਲ ਸਾਰਿਆਂ ਦੇ ਉੱਤੇ ਕਿਰਪਾਲ ਕਿਰਪਾ ਰੱਖੇ ਰਾਜਗੀਦੋ ਰਖੇ ਕਿਤੇ ਚਾਹੇ ਆਪਣੇ ਘਰ ਹੁੰਦਾ ਹੈ ਚਾਹੇ ਦੂਜੇ ਮਤਵੇ جے کوئی کسے نوں لاگ پہنچدا ہے او تو تو انوں لاگ دے دے چالو ہن اٹٹ جائے نہیں جے کوئی چھاتوں کوئی لاگ لے سکدا ہے لے لے کوئی نہ نوں نہیں کرپا اللہ محترم دی ہے جے تسی کچھ دے او دی فضل کر سکدے ہو سب تو کر سکدا ہوں نہیں کرنی مدد دی گل غلط جے کر ساگ دے نو کر ساگ نو نہیں کر دے ٹھیرو تار مگاد لیو تاں وے نہ نو نو تاں وے نہ नहीं نہیں ہے تو وے نہ دے اج بری چلن پھر وے سودی ساریاں دے اوپر دی کرپا دی ਆਪ ਧ੍ਰੜੇ ਅਵਰੋਹ ਨਾਮ ਦੇ ਦੇਖੋ ਆਪ ਜਪੇ ਨਹੀਂ ਤੇ ਆਪ ਧ੍ਰੜੇ ਸੀ ਧ੍ਰੜੇ ਸਿਰੋਜ ਵਿੱਚ ਹਾਂ ਗੱਲ ਠੀਕ ਹੈ ਜੋ ਮੈਂ ਸਮਝੀ ਫੇਰ ਦੂਰ ਨੂੰ ਆਪ ਜੇ ਗਲਤ ਜਪ ਲਿਆ ਗਲਤੇ ਜਪਾਈ ਜਾਵੇ ਠੜਾ ਹੈ ਪੱਕਾ ਗੱਲ ਵੀ ਹਾਂ ਗੱਲ ਠੋ ਵੀ ਬਿਲਕੁਲ ਇਹੀ ਹੈ ਫੇਰ ਕਹਾ ਕੇ ਪਾਉਂ ਨਾਨਕ ਉਹ ਬੈਸਣੋਂ ਪਰਮਗਤੀ ਪਾਵੇ ਆਪ ਜਿਹਾ ਬਰਾ ਨਾਮ ਜਬਾਵੇ ਥੋੜਾ ਜਿਹਾ ਸੋਧਨ ਕਰਤਾ ਹਾਂ ਜੁੜੇ ਕਹੇ ਆਪ ਜੁੜੇ ਹਾਂ ਨਾਮ ਜਿਪਾਵੇ ਨਾਨਕ ਉਹ ਬੈਸਣੋਂ ਪਰਮਗਤੀ ਪਾਵੇ ਉਹ ਬੈਸਣੋਂ ਪਰਮਗਤੀ ਪਾਵੇ ਫਿਰ ਪਰਮਗਤੀ ਫਿਰ ਆ ਦੇ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ